ਸ਼ਲੋਕ ਮਹੱਲਾ ਤੀਜਾ ਸਹਜੇ ਸੁਖ ਸੁੱਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗੱਲ ਲਾਏ ਹਾਂ ਅਤਜ ਸੁਖੀਅ ਹਲਫ਼ ਹੈ ਖੱਖੇ ਨੂੰ ਸਿਆਰੀ ਹੈ ਸੁੱਤੀ ਹੈ ਨਾ ਇਸ ਲਈ ਤੇ ਅਵਸਥਾ ਹੋ ਨਾ ਟਿਕ ਗਿਆ ਮਨ ਸਰਬੁੱద్ధి 26 ਮਹਾਵੇਰੇ ਸੰਸਗੀਆ ਜਾਂ ਬੱਚਾ ਸਿੱਖ ਜਾਂਦਾ ਹੈ ਜੇ ਸੁਖੀ ਸੁਤੀ ਸ਼ਬਦ ਦੀ ਸਭਾ ਸ਼ਬਦ ਚ ਸੁਹਾ ਕੇ ਸ਼ਬਦ ਦੇ ਵਿੱਚ ਜੁੜ ਗਈ ਅਸਲ ਦੇ ਵਿੱਚ ਸ਼ਬਦ ਵਿਚਾਰ ਚ ਜੁੜ ਗਈ ਮਾਇਆ ਮਾਇਆ ਤੋਂ ਲੱਗੀ ਸੌਂਕ ਦਾ ਮਤਲਬ ਐ ਨਹੀਂ ਹੈਗਾ ਜਿਵੇਂ ਆਪਾਂ ਸੌਂ ਕੇ ਸਭ ਕੁਝ ਭੁੱਲ ਜਾਂਦੇ ਹਾਂ ਸੌਣ ਦਾ ਮਤਲਬ ਮਾਇਆ ਦੇ ਗੁਰੂ ਨਹੀਂ ਭੁੱਲ ਗਏ ਮਾਇਆ ਹੀ ਭੁੱਲ ਗਈ ਸਾਰਾ ਜ਼ਮਾਨਾ ਭੁੱਲਣਾ ਹੀ ਹੁੰਦਾ ਸਹਿਜ ਸੁਖੀ ਸੁੱਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗੱਲ ਲਾਈ ਆਪੇ ਪ੍ਰਭ ਮੇਲ ਲਈ ਗੱਲ ਆਇਆ ਪ੍ਰਭ ਦੇ ਨਾਲੇ ਗੱਲ ਆ ਕੇ ਉਹਦੇ ਜਿਹੜਾ ਜਵਦ ਵਿਚਾਰ ਗਈ ਹੋ ਰਹੀ ਸੀ ਸੱਤ ਦੇ ਚਰਨਾਂ ਨਾਲੇ ਜੁੜ ਗਈ ਆਪਣੇ ਬੋਲ ਦੇ ਨਾਲੇ ਜੁੜ ਗਈ ਫਿਰ ਜਾ ਕੇ ਕੋਈ ਦੁਬਿਦਾ सहज सुभाए अंतर नाम बसया मन आए तुبدا चोकी आ जेडी माया दी जेडी की ना सोच कदे माया वालु कदे शब्द विचार वालु कदे सच वालु कदे झूठ वालु जेडी सी जेडी तेरे कुड्डी जी जाना जद छुट ਜਾਂਦਾ ਫਿਰ ਦੁਬਦਾ ਚੋਕੀ ਸੋਚਾਂ ਹੀ ਬੰਦ ਹੋ ਜਾਂਦਾ ਜਦ ਵਿਚਾਰ ਹੀ ਰਹਿੰਦੀ ਆ ਅੰਦਰ ਦੀ ਸ਼ਬਦ ਦੀ ਫਿਰ ਦੁਬਦਾ ਭਾਇਦੀ ਪੁੱਖ ਖਤਮ ਹੋ ਗਈ ਬਿਲਕੁਲ ਹੈ ਬਾਣੇ ਜਾਦੀ ਤੇ ਵਦਾ ਚੋਕੀ ਸਹਜ ਸੁਪਾਇ ਸੁਭਾਅ ਕਹਿ ਜਾ ਹੋ ਗਿਆ ਸਹਜ ਹੋ ਗਿਆ ਸੁਭਾਅ ਆਵੇ ਹੋ ਗਿਆ ਸਹਜ ਮਨ ਰੁਕਿਆ ਨਹੀਂ ਹੋਇਆ ਸੁਭਾਅ ਬਣ ਕੇ ਰੁਕਣ ਰੁਕਣਾ ਹੀ ਸੁਭਾਅ ਬਣ ਗਿਆ ਉਹਦਾ ਸੁਭਾਅ ਹੋ ਗਿਆ ਰੁਕਿਆ ਰਹਿਣਾ ਅੰਤਰ ਨਾਮ ਵਸਿਆ ਨਾਮ ਅੰਦਰ ਵਸ ਗਿਆ ਬੰਦੇ ਦੇ ਵਿੱਚ ਜੋ ਪ੍ਰਾਪਤੀ ਚਾਹੁੰਦਾ ਸੀ ਮਨ ਨਾਮ ਜਦ ਬਸ ਜਾਂਦਾ ਰੁਕੇ ਜਾਂਦਾ ਇਹ ਬਸੂਗਾ ਤਾਂ ਰੁਕੂ ਗਈ ਜਿਨ੍ਹਾਂ ਦੇ ਬਸਿਆ ਨਹੀਂ ਉਹਨਾਂ ਦਾ ਰੁਕਿਆ ਜੀ ਇਹ ਮਾੜਾ ਨਾਲ ਮਾੜਾ ਨਾਲ ਉਹ ਹੁੰਦਾ ਹੀ ਦੀ ਬਸਣਾ ਕੀ ਆਉਂਦੇ ਉਹ ਤਾਂ ਮੂਝੇ ਰਹਿੰਦਾ ਉਹਦੇ ਜੋ ਕੀ ਬਸਣਾ ਉਹਦਾ ਜੀਭ ਮੂਝੇ ਬਸ ਕੁਝ ਕੁਝ ਬੋਲੀ ਜਾਂਦੀ ਆ ਉਹਦੇ ਕੀ ਬਸਣਾ ਕੀ ਉਹ ਚ ਹੁੰਦਾ ਕਿ ਮੈਂ ਮੰਨ ਲੇ ਕਿ ਉਹ ਕਰਕੇ ਉਹ ਕਹਿੰਦੇ ਨੇ ਭਈ ਭਾਈ ਜਿਉਂਦੇ ਜਿਉਂਦੇ ਤਾਂ ਬਣ ਟਿਕਦਾ ਹੀ ਹੈ ਤੁਹਾਡੇ ਲਈ ਮੁਕਤੀ ਬਰਦੀ ਹੈ ਨੇ ਜੀ ਠੀਕ ਹੈ ਜੀ ਨਾਲੇ ਉਹ ਬਾਵਨ ਅਖਰੀ ਚ ਭਗਤ ਕਬੀਰ ਜੀ ਨੇ ਦੱਸਿਆ ਵੀ ਸ਼ਾਇਦ ਮੈਂ ਉਹਦੇ ਬਾਰੇ 52 ਚ ਵੀ ਨਾ ਦੱਸ ਸਕਾਂ ਹਾਂ ਆਪਾਂ ਉਹਨੂੰ 4 ਅੱਖਰਾਂ ਚ ਕਿਵੇਂ ਬੰਨ ਲਾਂਗੇ ਇਹ ਗੱਲ ਨਹੀਂ ਸਮਝ ਆਉਂਦੀ ਠੀਕ ਹੈ ਜੀ ਸੇ ਕੰਠ ਲਾਏ ਜੇ ਭੰਨ ਕਢਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ ਅੱਡੀ ਘੜੀ ਸਬੰਧ ਵੀ ਹਾਂਜੀ ਆ ਸ੍ਰੀ ਕੰਠ ਲਾਏ ਉਹੀ ਕੰਠ ਲਾਏ ਨੇ ਜੇ ਭੰਡ ਘੜਾਇ ਜਿਹੜੀ ਪਹਿਲੀ ਬੁੱਧੀ ਸੀ ਭੰਡ ਦਿੱਤੀ ਉਹਨੇ ਦੀ ਤੋੜ ਸੀ ਪਹਿਲੀ ਵੱਤ ਬਿਲਕੁਲ ਇਹ ਭੰਡ ਦਿੱਤੀ ਸੀ ਕੁਮਤ ਭੰਡਿਆ ਕਵਣ ਕੁਮਤ ਸੁਗ ਲਾਗੇ ਕੁਮਤ ਨੂੰ ਭੰਡ ਦਿੱਤਾ ਜੋ ਵੀ ਘੜੀ ਹੈ ਗੁਰਮਤ ਸੁਮਤ ਘੜਤੀ ਕਰਕੇ ਸੁਮਤ ਬਣ ਲੱਗੀ ਤਾਂ ਆ ਘਟਾ ਨੇ ਤਾਂ ਮਨ ਵਸਿਆ ਕੰਟ ਜਾਲ ਲੱਗ ਗਿਆ ਨਾ ਜਦ ਬਾਤ ਉਹਦੇ ਵਰਗੀ ਹੋਗੀ ਫਿਰ ਤੇਲੇ ਵਰਗੀ ਪਹਿਲਾਂ ਤੋ ਤੇ ਉਲਟ ਮੱਗਦਾ ਹੈ ਸਾਧੂ ਕਣ ਆਇਆ ਨਾਨਕ ਜੋ ਤੁਰ ਮਿਲੇ ਹੁਣ ਆਉਂ ਜਿਹੜੇ ਤੁਰ ਮਿਲੇ ਨੇ ਹੁਣ ਆਪੇ ਆਉਣ ਤੇ ਫੇਰ ਬੁਲਾ ਦੇ ਜਿਹੜੇ ਮਿਲਣਾ ਚਾਹੁੰਦੇ ਸੀ ਧਰ ਉਹਨਾਂ ਨੂੰ ਆਪੇ ਆ ਕੇ ਗੱਲ ਲਾ ਲੈਂਦਾ ਆਜੋ ਬਣ ਜਉਣਾ ਚਲਦੇ ਹੋ ਜਾਂ ਦੁਆਰੇ ਤੇ ਚਲੇ ਗਏ ਫਿਰ ਘੱਟ ਲਾ ਕੇ ਉੱਧਰ ਲੇ ਗਏ ਠੀਕ ਹੈ ਪਰ ਉਹ ਬਣ ਜਿਹੜੀਆਂ ਗੱਲਾਂ ਗੁਰਵੰਦ ਕਹਿੰਦੀ ਹੈ ਝੋਟਾ ਮਾਰਦੀ ਹੈ ਉਹ ਕਹਿੰਦੇ ਨਹੀਂ ਗੁੱਸੇ ਚ ਗੱਲ ਉਹ ਪਹਿਲੀ ਵਾਰ ਪਰ ਡੇੜੀ ਹੁੰਦੀ ਜੇ ਕਾੜੀ ਗੱਲ ਨਾ ਕਰੇ ਭੱਣਣ ਵੇਲੇ ਤਾਂ ਸਾਡ ਟੱਕੜੀ ਮਾਰਦੀ ਪੈਂਦੀ ਹੈ ਨਾ ਮੈਂ ਨਾਲ ਉਸੇ ਨੂੰ ਸਮਾਰ ਦੇਣ ਉਹ ਹੀ ਨਿਸ਼ਮਰਤੀ ਹੁੰਦੀ ਭੱਜ ਕੇ ਘੜੋਦੀ ਹੁੰਦੀ ਹੈ ਉਹ ਜਿਹੜੀ ਪਹਿਲੀ ਹੈ ਵੀ ਉਸੇ ਨੂੰ ਸਮਾਰਦਾ ਉਹਦੀ ਨਿਸ਼ਮਰਤੀ ਉਹ ਪੜਨ ਵਾਲੀ ਹੋਈ ਹੈ ਦੁਬਾਰਾ ਘੜੋਦੀ ਹੁੰਦੀ ਹੈ ਹੋਈ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ ਵਿਸ਼ਟਾ ਅੰਦਰ ਕੀਟ ਸੇ ਮੁਠੇ ਚੋਰ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੇ ਵੜਾ ਫੜਾਈ ਸੀ ਤੇ ਫੇਰ ਦੇਸੀਆ ਜਿਹੜੇ ਜਿੱਦੇ ਨਾਮ ਵਿਸਾਰਿਆ ਅਸਲੀ ਨਾਮ ਤਾਂ ਵਿਸਾਰਿਆ ਨਾਮ ਦੇ ਮੰਮੇ ਨੂੰ ਔਕੜ ਉਹਨਾਂ ਦੇ ਨਾਮ ਵੱਖਰੇ ਹੋ ਕੇ ਨੇ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਹਰੀ ਕਹਿੰਦਾ ਕੋਈ ਪ੍ਰਿਸ਼ਟ ਕਹਿੰਦਾ ਕੋਈ ਡਿਫਰੈਂਟ ਕਿਸਮ ਦੇ ਨਾਮ ਨੇ ਤੇ ਨਾਮ ਦੇ ਥੱਲੇ ਔਕੜ ਨਾਮ ਇੱਕ ਉਹ ਵੀ ਨਾਮ ਹੁਕਮ ਹੈ ਜਿਨ੍ਹਾਂ ਨੇ ਹੁਕਮ ਵਿਸਾਰਤਾ ਪਾਣਾ ਵਿਸਾਰਤਾ ਕਿ ਆਜਾ ਜਾਪਾਤਾ ਹੋਰ ਉਹ ਪਾਣੇ ਨੂੰ ਵਝਣਾ ਸੀ ਕੁਦਰਤ ਦੇ ਕਾਦਰ ਨੂੰ ਦੇਖਣਾ ਸੀ ਕੁਦਰਤ ਦੇ ਵਿੱਚੋਂ ਹੀ ਕਾਦਰ ਨੂੰ ਸਮਝਣਾ ਸੀ ਉਹ ਕਿਆ ਜਪ ਆ ਪਜਾਪ ਦੇ ਨੇ ਜਿਹੜੇ ਜਪ ਦੀ ਗੱਲ ਕਰਦੇ ਨੇ ਉਹ ਹੋਰ ਬੇਸਤਾ ਅੰਦਰ ਕੀੜੇ ਸੇ ਹੁੰਦਾ ਸਿਰਫ ਬੇਸਤਾ ਦੇ ਕੀੜੇ ਨੇ ਆਇਆ ਵਿੱਚ ਕੀੜੇ ਨੇ ਉਹ ਸਰੀਰ ਕੀੜੇ ਸਮਝ ਲਓ ਮੁਠੇ ਚੋਰ ਉਤਾਂ ਦੇ ਲੱਗੇ ਨੇ ਮਾਇਆ ਦੇ ਚੋਰ ਨੇ ਹੋ ਠੀਕ ਕੇ ਥਾੜੇ ਜਿਨੇ ਚਿੱਟੇ ਜਣ ਕੇ ਕੱਪੜੇ ਮਾਇਲੇ ਚਿੱਤ ਕਠੋਰ ਜਿਓ ਤਿਲ ਭੁਖ ਨਾਮ ਮੂਹੇ ਉਹਨਾਂ ਦਾ ਨੇ ਉਪਜਾ ਨਾ ਅੰਦਰੋਂ ਨਹੀਂ ਉਪਜਦਾ ਉਹਨਾਂ ਦੇ ਮੂਹੇ ਉਹਨਾਂ ਦਾ ਤੇ ਮੁਕ ਨਾਮ ਨਾ ਉਪਜਦਾ ਅੰਦਰੋਂ ਨਹੀਂ ਪੈਦਾ ਹੁੰਦਾ ਨਾਮ ਉਹਨਾਂ ਦੇ ਦੂਜੇ ਦੇ ਅੱਤੇ ਚੋਰ ਆ ਦੂਜੇ ਦੇ ਅੱਤੇ ਰਮਾਇਆ ਨੂੰ ਬੱਲੂ ਦੇ ਨੇ ਦੂਜੇ ਦੇ ਚੋਰ ਜਿਓ ਤੇ ਉਹ ਨਾ 부ਜੇ ਆਪਣਾ ਸੇਪਾ ਸੁਆ ਵੇਟੋਰ ਜਿਓ ਉਹਨਾਂ ਪਾਸ ਲੈ ਜਾਵੇ ਸੋਈ ਝੂਠੇ ਲਾਲਚ ਹੋਰ ਨਾਨਕ ਨੂੰ ਨਾਮ ਨਹੀਂ ਮੈਨੂੰ ਬਾਕੀ ਸਭ ਲਾਲਚ ਝੂਠੇ ਨੇ ਨਾਮ ਨੂੰ ਛੱਡ ਕੇ ਜਿੱਦੇ ਵੀ ਲਾਲਚ ਦਿੱਤੇ ਜਾਂਦੇ ਨੇ ਨਾ ਉਹ ਬਲੂ ਉਹ ਝੂਠੇ ਨੇ ਕਬੀਰ ਨੂੰ ਵੀ ਉਹੀ ਦਿੱਤੇ ਗਏ ਤੇ ਹਾਂਜੀ ਆਉੜੀ ਨਾਮ ਸਲਾਹਣ ਨਾਮ ਮਨ, ਅਸਥਰ ਜਗ ਸੋਈ ਹਿਰਦੈ ਹਰ ਹਰ ਚਿਤ ਵਾ ਦੂਜਾ ਨਹੀਂ ਕੋਈ ਕੋਸ ਸਤਿ ਲਾਪਰ ਦੀ ਮਾਇਆ ਸਰ ਆਇਆ ਹੈ ਦੋਸਰ ਆਫੇ ਦਾ ਸਥਰੇ ਹੈ ਕਿ ਜਿੰਨਾ ਜਰ ਸਰੀਰ ਹੈ ਮਾਇਆ ਦੇ ਵਿੱਚ ਹੈ ਉਹਨਾਂ ਚਿਰ ਫਿਰ ਨਹੀਂ ਹੋ ਸਕਦਾ ਆਇਆ ਹੀ ਸਾਡੀ ਦਿੱਖਣੀ ਜੀ ਜਿਹੜਾ ਆਇਆ ਹੈ ਉਹ ਗਲਤ ਆਇਆ ਹੈ ਤੇਰੇ ਤੇ ਕੁਝ ਵੀ ਨਹੀਂ ਹੈ ਸਿਰ ਸਿਰ ਕੁਝ ਨਹੀਂ ਸਿਰ ਦਾ ਨਾਮ ਸਿਰ ਗੁਰੂ ਨਾਮ ਸਲਾਇ ਜਿਹੜੇ ਨਾਮ ਦਾ ਸਿਫਲਾ ਕਰਦੇ ਨੇ ਨਾਮ ਬੋਲੂ ਇਹਨਾਂ ਦੇ ਮਨ ਵਿੱਚ ਨੂੰ ਪ੍ਰਗਟ ਵੀ ਹੈ ਐਸੇ ਜਗ ਸੋਈ ਉਹ ਥਿਰ ਜਗ ਦੇ ਲ ਉਹਦਾ ਮਤਲਬ ਹੈ ਅਡੋਲ ਰਿਬੋਰਨ ਕਰਕੇ ਅਡੋਲ ਨੇ ਸਰੀਰ ਜਿੱਥੇ ਫਿਰ ਜਿੱਤ ਰਿਹਾ ਫਿਰਦਾ ਸਰੀਰ ਕਰਕੇ ਉਹ ਤੁਰਦੇ ਫਿਰਦੇ ਨੇ ਮਾਨ ਕਰਕੇ ਅਡੋਲ ਫਿਰਦੇ ਹਰ ਹਰ ਚਿਤਵਾਂ ਫਿਰਦੇ ਦੇ ਵਿੱਚ ਹਰ ਹਰ ਹੈ ਉਹ ਚਿਤਵਦੇ ਨੇ ਦੂਜਾ ਨਹੀਂ ਕੋਈ ਹੋਰ ਦੂਜੀ ਕੋਈ ਥੁਨਾ ਦੇ ਅੰਦਰ ਜੇ ਨਹੀਂ ਚਲਦੀ ਮਾਇਆ ਦੀ ਕੋਈ ਪਲੈਨ ਹੋਰ ਕੋਈ ਕੀਡੀ ਇੱਛਾ ਦੂਜੀ ਕੋਈ ਇੱਛਾ ਦੀ ਰੋਧੇ ਹੁੰਦੇ ਤਾਂ ਨਾ ਮਤੋਂ ਪੈ ਲੋ ਕੋਈ ਰੋਮੀ ਰੋਮ ਹਰ ਉਚਰੈ ਖਿੰਖਿਨ ਹਰ ਸੋਈ ਗੁਰਮੁਖੀ ਜਨਮ ਸਰਕਾਰਤਾ ਨਿਰਮਲ ਮਲ ਖੋਈ ਉਹਨਾਂ ਦੇ ਮਨ ਜਿਹੜਾ ਅੱਲਾਹ ਸਰੀਰ ਹੈ ਨਾ ਅੱਲਾਹ ਉਹਦੇ ਰੋਮ ਰੋਮ ਦੇ ਵਿੱਚੋਂ ਬਾਹਲੇ ਸਰੀਰ ਦੇ ਰੋਮ ਦੀ ਉੱਤੇ ਬਾਹਲੇ ਸਰੀਰ ਦੀ ਕੀ ਮਤਲਬ ਹੈ ਜੀ ਜਿਵੇਂ ਜੰਨੀਆਂ ਕਰਨਾ ਸੂਰਜ ਦੀਆਂ ਦੇ ਨਿਕਲਦੀਆਂ ਸਾਰੇ ਰੋਮ ਨੇ ਉਹਦੇ ਜਿੱਦਾਂ ਸੂਰਜ ਤੋਂ ਕਰਨਾ ਨਿਕਲਦੀਆਂ ਸਾਰੇ ਉਹਦੇ ਰੋਮੇ ਨੇ ਜਦੋਂ ਅੰਦਰ ਉਹ ਬਿਗਾਸ ਹੁੰਦਾ ਜਿੱਦਾਂ ਇਹਦਾ ਗਿਆਨ ਦਾ ਇਹਦੇ ਫੁੱਟਦੀਆਂ ਨੇ ਕਬਲ ਖਿਲਦਾ ਸਾਰੇ ਰੋਮ ਬਰੋਮ ਗੁਰੂ ਬਗੀ ਰੋਮ ਰੋਮ ਹਰਿਆ ਹੋਗਾ ਸਾਡੇ ਅੰਦਰਲਾ ਹਿੱਸਾ ਜਿਹੜਾ ਸਪੇਸ ਹੈ ਉਹਦੇ ਵਿੱਚੋਂ ਆਪ ਚ ਜੋ ਲੈਕ ਕਰਦੀ ਹੈ ਜਿਵੇਂ ਆਕਾਸ਼ ਇਹਦਾ ਸਪੇਸ ਹੈ ਵਿਚ ਸੂਰਜ ਹੈ ਉਹਦੇ ਚੋਂ ਕਿਹੜੀ ਗੱਲ ਦੀ ਹੁੰਦੀ ਖਿੰਖੇਨ ਹਰ ਸੋਈ ਖਿੰਖੇਨ ਉਹਦਾ ਹੀ ਉਚਾਰਨ ਹੁੰਦਾ ਹਰਦਾਈ ਅੱਛਾ ਜੀ ਉਚਾਰਨ ਹੋ ਰਿਹਾ ਹਿਰਦੇ ਜਿਹਦਾ ਹੁਣ ਜਿਹਨਾਂ ਆਪਨੇ ਹੋ ਰਿਹਾ ਹੈ ਹੁਣ ਠੀਕ ਹੈ ਅੰਪਲਿਖਾ ਵੀ ਰੂਮ ਸਰੀਰ ਦੇ ਰੂਮ ਹੈ ਇਹ ਨਹੀਂ ਪਤਾ ਵੀ ਸਰੀਰ ਤਾਂ ਜੜ ਹੈ ਇਹਦਾ ਜੜ ਹੈ ਇਹਦੇ ਰੋਮਾਂ ਦਾ ਕੀ ਮਤਲਬ ਸਾਡੇ ਸਰੀਰ ਨਾਲ ਤਾਂ ਸੰਬੰਧੇ ਤਰ੍ਹਾਂ ਟੁੱਟ ਗਿਆ ਉੱਪਰ ਹਿਰਦੇ ਹਰਾਂ ਚਿਤਵਾਂ ਦੂਜਾ ਨਹੀਂ ਕੋਈ ਇਹ ਤਾਂ ਟੁੱਟ ਗਿਆ ਸੀ ਹਾਂਜੀ ਹਾਂਜੀ ਰੋਮ ਰੋਮ ਹਰੀ ਉੱਚਰ ਹੈ ਖਿਨ ਖਿਨ ਹਰ ਸੋਈ ਗੁਰਮੁਖ ਜਨਮ ਸਕਾਰਤਾ ਨਿਰਮਲ ਮਲਖ ਹੋਈ ਗੁਰਮੁਖ ਜਨਮ ਸਕਾਰਤਾ ਹੋ ਗਿਆ ਨਿਰਮਲ ਹੋ ਗਿਆ ਮਾਇਰਦੋਂ ਖੋੜ ਜੜੀ ਸੀ ਖੋ ਦਤੀ ਉਹ ਸੀ ਜਿਹਨੇ ਸਾਰੇ ਖਤਮ ਕਰਤੇ ਨਿਰਮਲ ਮਲਖ ਹੋਈ ਨਿਰਮਲ ਜਦ ਹੋਇਆ ਜਾ ਖੋਈ ਗਈ ਤੇ ਸਕਾਰਤਾ ਜਨਮ ਤੇ ਔਗੁ ਅੱਛਾ ਹਾਂ ਨਿਰਮਲ ਨੂੰ ਔਕੜ ਹੈ ਤਾਂ ਆਪ ਜਿਹੜੇ ਸ਼ਬਦ ਪੜ੍ਹਦੇ ਹਾਂ ਤੇ ਰੁਕ ਜਾਂਦੇ ਆਂ ਜਾ ਨਾ ਆਪਾ ਔਕੜ ਤੇ ਰੁਕਾਂਗੇ ਹਾਂਜੀ ਫਿਰ ਇਹਨੂੰ ਪੜ੍ਹਨ ਦਾ ਵੀ ਵਿਧੀ ਚਾਹੀਦੀ ਹੈ ਗੁਰੂਮੁਖੀ ਜਨਮ ਸਕਾਰਤਾ ਨਿਰਮਲ ਮਲਕ ਹੋਈ ਨਿਰਮਲ ਤਾਂ ਹੋਇਆ ਵੀ ਮਲ ਨਹੀਂ ਨਿਰਮਲ ਮਲ ਤਾਂ ਕੁਝ ਗੱਲ ਨਹੀਂ ਬਣਦੀ ਜੀ ਰੋ ਜਨਮ ਦਾ ਮਲ ਹੀ ਜੋੜ ਸਕਦੇ ਠੀਕ ਹੈ ਹੋਰ ਮੈਂ ਇੱਕ ਵਾਰ ਸੁਣਿਆ ਕੋਈ ਐਸ ਤਰ੍ਹਾਂ ਹੀ ਪੜਦਾ ਸੀ ਗੁਰਮੁਖ ਜਨਮ ਸਰਕਾਰਤਾ ਨਿਰਮਲ ਮਲ ਕੋਈ ਮੰਨ ਲਓ ਕਿਉਂ ਕੜਾ ਨਿਰਮਲ ਨੂੰ ਕਿਉਂ ਕੜਾ ਫਿਰ ਇਹਦਾ ਕੀ ਫਾਇਦਾ ਸੀ ਕੜਾ ਲਾਉਣ ਦਾ ਠੀਕ ਹੈ ਨਾਲੇ ਛੇ ਅੱਖਰ ਉਹਨੇ ਵਿੱਚੋਂ ਤੋੜ ਲਿਆ ਪੁਰਖ ਤੇ ਆਇਆ ਅਮਰਾ ਪਦ ਹੋਈ ਹਾਂ ਜੀ ਨਾ ਜੀਵਦਾ ਪੁਰਖ ਤੇ ਆਇਆ ਉਹ ਅਮਰ ਹੋਇਆ ਜੀਵ ਦੇ ਕੋ ਜੀਵਤਾ ਮਿਲੈ ਇਹ ਬਤੇਗਾ ਜੀਵਤਾ ਹੀ ਮਿਲੂਗਾ। ਮਰੇ ਆਇਆ ਜਿਉਂਦੇ ਨੂੰ ਕੀ ਮਿਲੂਗਾ। ਜਦ ਜੀਵਨ ਪੁਰਖ ਜੀ ਜਦੋਂ ਉਹ ਆਪਣਾ ਪਦ ਮਿਲ ਗਿਆ ਆਪ ਵੀ ਪ੍ਰਤੀਕਾਲੇ ਕਿਉਂਦਾ ਹੋ ਗਿਆ ਸਮਰ ਹੋ ਗਿਆ। ਨਸਤੀਤ ਹੋ ਰਹਿਤ ਹੋ ਗਿਆ। ਜੀਵਦਾ ਪੁਰਖ ਦਾ ਭਾਵ ਚੇਤਨ ਪੁਰਖ ਦੀ ਗੱਲ ਹੈ ਚੇਤਨ ਪੁਰਖ ਦੀ ਗੱਲ। ਜਿਹੜਾ ਆਪਣਾ ਮੂਲ ਹੈ ਜੀ। ਸਤਪੁਰਾ ਜਿਹੜਾ ਸਤਵਨ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਸ਼ੀ ਪੁਰਖ ਹੈ ਸਭ ਮੇਰਾ ਸਮਾਇ। ਇਹ ਗੱਲ ਬਿਲਕੁਲ ਸਾਫ਼ ਕਰਦੀ ਹੈ ਕਿ ਉਹ ਸਤਿਗੁਰ ਜਿਹੜਾ ਉਹ ਜੀਵਦਾ ਪੁਰਖ ਹੈ ਉਹ ਜੀਵਦਾ ਹੀ ਹੈ ਅੱਗੇ ਅਕੇਲਾ ਉਹ ਹੰਸਾ ਇਹਦੀ ਤਾਂ ਸੁਰਤੇ ਮਰਦੀ ਹੈ ਮਰਦਾ ਕੀ ਹੈ ਜੀਵ ਵੀ ਨਹੀਂ ਮਰਦਾ ਕੋਈ ਸੁਰਤ ਬਾਦ ਅਹੰਕਾਰ ਬਾਦ ਅਹੰਕਾਰ ਮਰ ਜਾਂਦਾ ਸੁਰਤ ਮਰ ਜਾਂਦੀ ਹੈ ਸੁਰਤ ਮਾਰ ਕੇ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ ਕੰਪਲੈਕਸ ਚਲਾ ਗਿਆ ਠੀਕ ਹੈ ਜੀ ਤੇ ਸਵੇਭੰਗ ਤੋਂ ਇਹ ਦੁਬਾਰਾ ਹੁਣ ਪ੍ਰੇਮ ਨਾਲ ਇੱਕ ਹੋ ਗਿਆ ਇੱਕ ਹੋ ਗਿਆ ਠੀਕ ਹੈ ਜੀ ਇੱਥੇ 25ਵੇਂ ਪੌੜੀ ਦੀ ਸਮਾਪਤੀ ਹੈ ਜੀ ਜੀ